ਜੋ ਕਛ ਕਰੇ ਜੋ ਪ੍ਰਭ ਕੇ ਰੰਗ ਸਦਾ ਸਦਾ ਵਸੇ ਹਰ ਸਾੰਗ ਜੋ ਕੁਛ ਕਰੇ ਸਭ ਤੇ ਰੰਗ ਤੇ ਕੋ ਜੋ ਕਰਦਾ ਹੈ ਉਹ ਦਾ ਰੰਗ ਨਹੀਂ ਤੇ ਹੋ ਜਾ ਉਹ ਹੀ ਜਾਣਦਾ ਹੈ ਹੈਗਾ ਸਭ ਕੁਝ ਠੀਕ ਹੈ ਪਰ ਜੇ ਦੀ ਉਹਨਾਂ ਨੇ ਸਮਝਿਆ ਕਬ ਦੀ ਆਪਣੇ ਵਾਸਤੇ ਗੱਲ ਤੇ ਉਹਦੇ ਰੰਗ ਉਹ ਦੱਸੇ ਨਹੀਂ ਜਾ ਸਕਦੇ ਜੋ ਕੁਛ ਕਰਦਾ ਉਹਦੇ ਬਾਰੇ ਨਹੀਂ ਕੋਈ ਕਹਿ ਜਾ ਸਕਦਾ ਬਿਆਨ ਨਹੀਂ ਜਾ ਸਕਦਾ ਉਦੇ ਬਾਰੇ ਅਸੀਂ ਕੋਈ ਰਾਏ ਨਹੀਂ ਦੇ ਸਕਦੇ ਪ੍ਰਭ ਕੇ ਰਸਾਇਕੇ ਥੜਾ ਜਲਾ ਦੇ ਜੋ ਕੁਛ ਕਰੇ ਸੋ ਪ੍ਰਭ ਕੇ ਰੰਗ ਉਹ ਰੰਗ ਸਦਾ ਇੱਥੇ ਕੁਛ ਵੀ ਕਹਿਣ ਤੋਂ ਗੁਰੇਜ਼ ਕੀ ਕਰਦੇ ਕਿ ਨਾਲ ਵੀ ਨਾਲ ਹੁਕਮ ਹਾਂ ਸਰ ਨਾਲ ਨਾਲ ਵਸਾ ਉਹ ਕੀ ਕੋ ਉਪਏ ਦੇ ਸ੍ਰਭ ਕੇ ਰੰਗ ਦੇ ਉਹਦੀ ਫਰਜੀ ਹੈ ਮੌਜ ਹੈ ਨਾ ਮਰਜ਼ੀ ਕਰਦਾ ਆਧੂਆ ਕੀ ਕਹਿ ਸਕਦਾ ਸਾਇਦ ਉਸ ਤਰ੍ਹਾਂ ਹੋਵੇ ਸੋ ਹੋਏ ਕਰਨੇ ਹਰ ਪਛਾਣੇ ਸੋਏ ਸਾਇਦ ਸਭਾਏ ਹੋਵੇ ਸੋਏ ਜੋ ਹੋ ਰਿਹਾ ਹੈ ਸੰਸਾਰ ਚ ਜੇ ਕਿਸੇ ਆਦਮੀ ਦੀ ਵਿਵਸਥਾ ਅੱਛਾ ਰਹੇ ਸਭ ਕੁਝ ਹੁੰਦੇ ਹੋਏ ਵੀ ਸੱਚਾ ਮਰਜੀ ਹੋ ਜਾ ਤਾਂ ਉਹਦੀ ਸਹਜ ਵਿਵਸਥਾ ਪਾਉਣਾ ਹੋਵੇ ਉਹ ਕਰਨੇ ਹਰ ਪਛਾਣੇ ਸੋਏ ਉਹ ਕਰਨੇ ਹਰ ਨੂੰ ਪਛਾਣ ਹੁਕਮ ਪਛਾਣ ਲੈ ਉਹਨੇ ਤਾਂ ਉਹਦਾ ਇਹ ਤਾਂ ਹੁਕਮ ਪਛਾਣ ਲਿਆ ਉਹਦੀ ਲੋਗ ਦਾ ਕੋਈ ਫਰਕ ਨਹੀਂ ਪੈ ਰਿਹਾ ਕੋਈ ਜੋ ਢੋਲਦਾ ਨਹੀਂ ਤਾਂ ਜਾਣਦਾ ਕੌਣ ਕਰ ਰਿਹਾ ਜੈਸਾ ਸਾਤ ਐਸਾ ਦਿਸਤਾ ਬਿਠਾ ਲਾ ਕੇ ਜਿਵੇਂ ਕਿਤਾ ਹੈ ਵੀ ਡੋਲੇ ਆਦੀ ਬਿਠਾ ਜੇ ਮਿਠਾਣੇ ਲੱਗਿਆ ਤਾਂ ਕੌੜਾ ਨਹੀਂ ਲੱਗਿਆ ਤਾਂ ਮਿਠਾ ਹੋ ਗਿਆ ਪਰ ਜੇ ਮਿਠਾ ਲੱਗੇ ਇੰਨੇ ਤੋਂ ਮਿਠਾ ਲਗੇ ਹਰ ਕੁਝ ਇੱਕ ਕੀਤਾ ਫਿਰ ਜਿਸ ਜੈਸਾ ਸਾਥ ਜੈਸਾ ਦ੍ਰਿਸ਼ਟੀ ਆਣਾ ਹੁਕਮਾਂ ਦੇ ਸਾਹਮਣੇ ਆ ਗਏ ਸਰ ਹੁਕਮਾਂ ਪਰ ਗੜ ਹੋ ਜਾਂਦਾ ਸਿੱਧਾ ਆਪੇ ਕਹਾਂ ਮੈਨੂੰ ਗੁਜਲੀ ਗੁਜਲੀ ਕਦ ਨਿਆਣੇ ਨੇ ਨਾ ਬੁਜਰਾਂ ਦਾ ਉਹ ਐ ਤੂੰ ਆਪੇ ਬਾਹਰ ਆ ਜਾਂਦਾ ਤੁਸੀਂ ਕੀ ਕਰਦੇ ਗਿਆ ਉਹ ਜਦ ਫੜਿਆਈ ਆ ਜਾ ਫਿਰ ਆ ਜਾਂਦਾ ਤੇ ਉਪਜੇ ਤੇ ਸਮਾਏ ਸਮਾਏ ਕੋਈ ਸੁਖ ਨਿਰਾਣ ਉਰੋਂ ਬਲ ਆਵੇ ਜਿਸ ਦੇ ਉਪਜੇ ਤੇ ਸਮਾਏ ਸਮਾਏ ਜੋ ਚੀਜ਼ ਜਿੱਥੋਂ ਉਪਜੇ ਉਥੇ ਸਮਾਏ ਜਾਂਦਾ ਸੁੱਖ ਨਾ ਦਾਨ ਤੇ ਨੂੰ ਬਣਾ ਉਹ ਸੁੱਖ ਦੇ ਰਾਹ ਉਹ ਬਣਾਏ ਉਹ ਬਣਾਏ ਜਿਹੜੇ ਚ ਸਮਝਦੇ ਨੇ ਕਿ ਦੇ ਵਿੱਚ ਸੋਣਾ ਸੁਗਾਣਾ ਉਹਨਾਂ ਸੁੱਖਾਂ ਨੇ ਪਰ ਚੁੱਪ ਕਰਕੇ ਆਪਣੇ ਮੂਰਤ ਚ ਜਿੱਥੋਂ ਪੈਦਾ ਹੋਇਆ ਸੀ ਸੁੱਖ ਸਾਗਰ ਚ ਰਹਿ ਜਿੱਥੋਂ ਉਪਜੀ ਤੇ ਉਪਜੀ ਸੁੱਖ ਜਿੱਥੋਂ ਬਹੁਤ ਫਾਇਦਾ ਹੋਏ ਤੇ ਅੰਤ ਤੇ ਅਨੋਖੇ ਰੂਪ ਚ ਮਾਗੀ ਤਾਂ ਸ਼ਬਦ ਛੱਡ ਕੇ ਬਾਹਰ ਆਈ ਦੀ ਸ਼ਬਦ ਤੇ ਜਾ ਸਮਾਈ ਸ਼ਬਦਾਂ ਦਾ ਰਹਾਉ ਉਹ ਸੁਖ ਨਿਧਾਨ ਉਹਨੂੰ ਬਣਾਇਆ ਸੁਖ ਨਿਧਾਨ ਬਣ ਗਿਆ ਫਿਰ ਨਾਮ ਨਾਲ ਜੁੜ ਕੇ ਦੁੱਖ ਥੇ ਨਾਮ ਦੀ ਤਾਂ ਭੁੱਖ ਨਾਲੇ ਖਾਈ ਜਾਂਦੀ ਦੁੱਖ ਸੱਚੇ ਨਾਮ ਕੀ ਲਗਾ ਕੋ ਤਾਂ ਭੁੱਖ ਨਾਲੇ ਹੋ ਜਾਂਦਾ ਜੇ ਸੇ ਭੁੱਖ ਪੂਰੀ ਹੋਈ ਤੇ ਉਸਦਾ ਸੁਖ ਸਾਗਰ ਜੇ ਸੁਖੋ ਚਾਹੇ ਸੁਧਾ ਜਰਣਾ ਉਹ ਵੀ ਸਾਹ ਹੋ ਜੀ ਆਪਸ ਕੋ ਆਪ ਵੀ ਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਣ ਆਪਸ ਕੋ ਆਪ ਦੇ ਨੋ ਮਾਨ ਮਾਨ ਮਨ ਮੰਨ ਗਿਆ ਆਪਣੇ ਮੂੜ ਜਸ ਬਾਗਿਆ ਦੋਹਾਂ ਦਾ ਇਮਾਨ ਹੋ ਗਿਆ ਜਿੱਦਾਂ ਜਦੋਂ ਲੜਦੇ ਸੀਗੇ ਕਿਹਨੂੰ ਦੇਣਾ ਸੀ ਦੋਹਾਂ ਦੇ ਦਰਦ ਸੀ ਕੋਈ ਦਾ ਦੁਹਾਂ ਕੋਈ ਨਹੀਂ ਸੀ ਦੋ ਨਹੀਂ ਰਹਿਤਾ ਹੋਇਆ ਦੋ ਆਨ ਮੰਨ ਲੜ ਆਪ ਉਸ ਕੋ ਆਪ ਆਪੇ ਸਮਝ ਨਾਲ ਆਪਣੀ ਸਮਝ ਨਾਲ ਇਹ ਦੋਏ ਉਹਨੇ ਮੈਂ ਚੜਤੀ ਦੋਏ ਇੱਕ ਹੋ ਗਏ ਤਾਂ ਦੋਹਾਂ ਦਾ ਇਮਾਨ ਹੋ ਗਿਆ ਆਪ ਉਸ ਕੋ ਆਪ ਦੀ ਨੋਟ ਨਾਨਕ ਪ੍ਰਭ ਜਨ ਇੱਕ ਨੇ ਕਿੰਨਾ ਦੇਣਾ ਇਮਾਨ ਹੜਾਈ ਦਾ ਕਰਦੀ ਹੈ ਇੱਕ ਤਾਂ ਵੀ ਆਪੇ ਕਰਦੀ ਹੈ ਇੱਕ ਤਾਂ ਗੱਲ ਹੀ ਲੋਕੋ ਜਿਹੜੇ ਉਹ ਮੂਰਖ ਕਹਿੰਦੇ ਸੱਚ ਬੋਲ ਕੇ ਉਹ ਕਹਦੇ ਕਹਿੰਦੇ ਉਹ ਐਵੇਂ ਲੜੀ ਜਾਂਦੇ ਨੇ ਭਾਈ ਭਾਈ ਨੇ ਕੱਲਾ ਆਪੇ ਬੰਦਾ ਹੋ ਗਿਆ ਆਪੇ ਗਿਆਨੇ ਨੇ ਕੋਚਣਾ ਕੀਤਾ ਬਹੁਤ ਮਸ਼ਲਾ ਇਕਬਾਲ ਲੜ ਕੇ ਇਕੱਠੇ ਹੋਣਾ ਇਹਦਾ ਤਾਂ ਹੁਣ ਹਵਾ ਬਣੇ ਨਾ ਵੀ ਉਹ ਨੌੜ ਲਾ ਗਿਆ ਉਹ ਦੋਵਾਂ ਆਪਣੀ ਸਮਝ ਨਾਲ ਮੰਨ ਲਿਆ ਆ ਗੱਲ ਆ ਨਾਨਕ ਪ੍ਰਭ ਜਨ ਇੱਕੋ ਜਾਣ ਪ੍ਰਭ ਜਨ ਇੱਕੋ ਜਾਣ ਹੁਣ ਪ੍ਰਭ ਵਰ ਜਾਣੇ ਇੱਕੋ ਹੀ ਨੇ ਮਾਨਵ ਰਚੇ ਤੇ ਕੋਈ ਨਹੀਂ ਜਿਹਨੇ ਹੈ ਜਿਹਨੇ ਮੰਦੀ ਹੁੰਦੀ ਹੈ ਹੁਣ ਦੋ ਹੈ ਇਹ ਹੈ ਇੱਕ ਪਹਿਲਾ ਇਹ ਜਿਆਦਾ ਤੂਰ ਤਹਿਦਾ ਵੀ ਹੈਦਾ ਥੋੜੇ ਜਿਆਦਾ ਹੈ ਇਹ ਹੁੰਦਾ ਜ਼ਿਆਦਾ ਇਹਦਾ ਤੂਰ ਇਹਦਾ ਸਮਾ ਥੋੜੇ ਜਿਆਦਾ ਗਰਮ ਹੈ ਹਰ ਕਿਸੇ और भर दो नगल के सो ऑन